ਉ ਨਿਤਰ ਪਤਮਨ ਕਰਤਾ ਪੁਰਖੋ ਜਿੜਤੈ ਜਿੜ ਵੈਰ ਅਤਾਲ ਨਿਰਪੋ ਅਜੀਤ ਚਲਿ ਜੁਰ ਕਰਤ ਦੇ ਜਤ ਆਦ ਸਤਿ ਦੁਆ ਦੇ ਸਤਿ ਹੈ ਤੀ ਸਤਿ ਨਾਨਕ ਹੁਸੀ ਕੀ ਸਤਿ ਆਜ ਕੰਮੀਤੀ ਦੇ ਸਦਗਰੀ ਸਾਹਿਬ ਜੀ ਕਿਹਾ ਜਦ ਇਹ ਯਾਤਰੇ ਸਮੇਂਰ ਪਰ ਸਿਰ ਦਿੱਕੇ ਦੀ ਮੰਗੀ ਜੀ ਕਦੀ ਆਈ ਉਹ ਸਿੱਕੇ ਕੁੱਝ ਤੇ ਆਈ ਹੋਏ ਹਨ ਕੋਸ਼ਲਨੀ ਹੀ ਫਰਮਾਉਂਦੇ ਹਾਂ ਇੱਕ ਓ ਅੰਕਾ ਜਿਸ ਨੂੰ ਵਾਇਕੀਨ ਪ੍ਰਵੇਸ਼ ਕਰਿਆ ਕਰਕੇ ਸਾਥ ਮਨੁੱਖ ਨੂੰ ਜਿਆਤੀ ਦਾ ਦੇਖਣਾ ਹੈ ਉਹ ਪ੍ਰਵੇਸ਼ੀ ਦਾ ਸਿਆਤੀ ਕੋਈ ਇਹ ਕੋਈ ਤੇ ਰਾਤਰੀ ਪ੍ਰਵੇਸ਼ੀ ਹੈ ਜਿਆਤੀ ਨੂੰ ਉਹਨੇ ਖਤੇ ਬਕਰੇ ਪਸ਼ੂ ਹੰਦੇ ਇਹ ਉਸਨੂੰ ਜਿਆਤੀ ਦੂਸਰੀ ਜਗ੍ਹਾ ਨਹੀਂ ਹੈ ਅਬੇ ਸ਼ਾਇਦ ਕੋਈ ਹੋਰ ਵੀ ਦਰਸ਼ੀ ਆਂੀਆਂ ਪੱਤਰ ਫਲ ਫੁੱਲੇ ਕਿ ਵਖੇ ਵਖੇ ਹੁੰਦੇ ਨੇ ਜੀਵ ਅੰਤਲੇ ਆਖੇ ਵਰਦੇ ਨੇ ਕਹੇ ਵਰਦੇ ਵਖੂਅਤ ਸੇ ਆਤਮਿਕ ਅੰਤਰਾ ਹੋਵੇ ਜਿਹੜੇ ਅੰਗਲੇ ਉਹ ਵੀ ਜੀਵ ਤੇਰੀ ਗੰਦਾਰੇ ਜਿਨ੍ਹਾਂ ਗਾਰੇ ਜਿਨ੍ਹਾਂ ਲੋਕਾਂ ਦੀ ਮਰਿਆ ਹੋਏ ਸਾਰੀਆਂ ਵਿੱਚ ਉਹ ਪਰਮੇਸ਼ਰ ਦੀ ਜੋਤ ਸਹਨੇ ਜੋਤ ਦਾ ਸੋ ਜੇਜਾ ਜਾਣੇ ਸਹਨੇ ਜਾਣੇ ਹੋਵੇ ਅਸਾਜੋ ਸੂਤ ਹੈ ਉਹ ਜਾਤੀ ਬਜਾਤੀ ਸੁਭਤ ਤੇ ਹੋਇ ਇਸ ਦੇ ਤਰ੍ਹਾਂ ਦੇਸ਼ ਭਾਲ ਵਸੂ ਪ੍ਰਗੇਗ ਰਾਜ ਦੇਸ਼ ਕਰਕੇ ਅੰਤ ਨਹੀਂ ਆਉਂਦਾ ਜਿਵੇਂ ਕੋਈ ਮਾਝੇ ਵਾਲਾ ਮਿਹੰਦਾ ਆਉਂਦਾ ਕੋਈ ਮਲਵਈ ਕਹਿੰਦਾ ਕੋਈ ਜਹਾੜੀਆ ਕਹੋਂਦਾ ਕੋਈ ਕੋਈ ਬੰਨੀ ਦੇ ਇਲਾਕਾ ਕਹੋਂਦਾ ਦੇਸ਼ਾਂ ਦੇ ਹੋਣੇ ਕਰਕੇ ਹੈ ਜਿਸ ਕਰਕੇ ਦੇਸ਼ ਕਰਕੇ ਇਹਦਾ ਖੋਲ ਨਹੀਂ ਹਿੱਲ ਸਕਦਾ ਅਜੇ ਕਾਲ ਕਰਕੇ ਅਸੀਂ ਕੋਈ ਰਾਜ ਨਹੀਂ ਬੰਨੇ ਕੋਈ ਜਮੀਂ ਬੰਨੇ ਉਹ ਵੀਰ ਜੀ ਜਨਮ ਦੇ ਨੇ ਕਹਿੰਦੇ ਸੜਦੇ ਹੈ ਗੁਰਬਿੰਦ ਦੇ ਜਨਮ ਦੇ ਕੱਤ ਪਈ ਸਭ ਤੇ ਕਿ ਉਹ ਫੁਰੇ ਜੀ ਕਿਸੇ ਸਰਕਾਰ ਹੋ ਰਹੇ ਕਾਇਰ ਕੋ ਨਾ ਸਹਦਾ ਹੈ ਨਾ ਤੂ ਬਾਤ ਨਾ ਮਾਇਕਿੰਦੀ ਜਹਾਇ ਕੋ ਸਭਾ ਕੋਈ ਐਸਾ ਹੋਣੀ ਅਜੇ ਇਸੇ ਪ੍ਰਕਾਰ ਹੈ ਕਾਲ ਬਸਤੀ ਦਸਨ ਦੇ ਕੋਈ ਵੀ ਦੀਆਂ ਵਸਤੀਆਂ ਕੋਈ ਮੰਨੀਆਂ ਨਹੀਂ ਜਿਹੜਾ ਦੋਖਣਾ ਦਾ ਦੀ ਦਾ ਜਾਗਰਤ ਵਿਸ਼ਵਾਸ ਚਾਰਾ ਮੰਨੀ ਅਤੇ ਕੈਸਿਨਾ ਦਾ ਦੀ ਸੁਖਨ ਦਾਸਾ ਦਾ ਦੀ ਗੋਵਤ ਕਰਕੇ ਤੁਹਾਨੂੰ ਦੇ ਇਹ ਤਿੰਨਾਂ ਬਾਦੀਆਂ ਵਸਤੀ ਦਿੰਦੇ ਹੁੰਦੇ ਇਸੇ ਲਈ ਅੰਦਰ ਮਹਾਦੀ ਬਾਦੀ ਹੋਣ ਕਰਕੇ ਜਿਵੇਂ ਇੱਕ ਦੇਲਸ ਦੇ ਨਾਤਾ ਦੇਲਸ ਹੈ ਉਹ ਸਾਰੇ ਕੱਢੇ ਨੇ ਬਣਾ ਦੇ ਇਹੋ ਜਿਹੇ ਤਰ੍ਹਾਂ ਸਾਰੇ ਬੇਮੰਡਾ ਦਾ ਜਿਹੜਾ ਆ ਉਹਦੇ ਮੰਨੇ ਅੱਜ ਦੀਆਂ ਇਸ ਪ੍ਰਕਾਰ ਦਾ ਬਰਾਦ ਰੂਪ ਜਿਹੜਾ ਹੈ ਉਹ ਗਰੀਬ ਬਰਾਦ ਰੂਪ ਕਰਕੇ ਬਹੁ ਮਾਇਆ ਕਰਕੇ ਅਪੋ ਇਸੇ ਤਰ੍ਹਾਂ ਹਿੰਮਦਰੋ ਸਾਰੇ ਦੀ ਸਭ ਨੇ ਆਸਵਾ ਬਰਵ ਨੇ ਜਿਹੜਾ ਹਿੰਮ ਪ੍ਰਕਾਸ਼ ਨੂੰ ਉਨੇ ਜਨਨਗਾਰੂ ਜੀ ਜਿਸ ਸਮਾਸ਼ੀ ਬਾਦੀ ਕਰਕੇ ਅਗਿਆਤ ਕਰਦੀ ਜਿਹੜਾ ਸੂਖੰਦ ਦੀ ਸੋਲਦਾਸਾ ਹੈ ਉਹ ਅਗਿਆਤ ਕੋ ਹੋਇਆ ਜਾ ਰਿਹਾ ਹੈ ਉਹ ਮਾਇਆ ਕਰਕੇ ਕਿੰਨ ਲੱਸੀਆਂ ਇਸੇ ਦੇ ਅਗਿਆਤ ਕਰਕੇ ਬਣਾ ਤੋਂ ਪ੍ਰਾਪਤ ਨਾ ਕਰਕੇ ਵਿਸ਼ਵਾਦੀ ਮਾਇਆ ਤੋਂ ਵਿਗਿਆਤ ਕਰਕੇ ਬਚਣਾ ਨਹੀਂ ये देखिए ये दे, तीर्थ जी ये दासी पे तेरा ये उपदेश है ऐसा ही हमारा आदर परमेश्वर है वोंदा वो ओम द्वारा श्री कंसार इक पहले मैंने उन्होंने यह ਮੂਰਤਾਂ ਨੂੰ ਕਿਹਾ ਜਾਂਦਾ ਕੋਈ ਸ਼ੈਦ ਕੀਤਾ ਉਹ ਕੋਈ ਨਾ ਰੋਕੋ ਸਾਰੀ ਸ੍ਰਿਸ਼ਟੀ ਕਾਇਆ ਕਰ ਦਿੱਤੀ ਇਸੇ ਪ੍ਰਕਾਰ ਓਂਕਾਰ ਸ਼ਬਦ ਨੂੰ ਜਦੋਂ ਸਾਪ ਜਗੇਗਾ ਇਸ਼ਾਰਿਆ ਓਂਕਾਰ ਸ਼ਬਦ ਤੋਂ ਤਾਂ ਪੂਰੀ ਜਗਤ ਚੁੱਲ ਰਹਾ ਹੈ ਉਹ ਤੋਂ ਸਾਰੀ ਜਗਤ ਜਿਵੇਂ ਇਹ ਧੂਨੀਿੱਟੀ ਸਾਰਾ ਪਰਗਟ ਹੋ ਗਏ ਸਾਰੇ ਵਿੱਚ ਸਾਰਾ ਓਂਕਾਰ ਜੋ ਸਾਰੇ ਦੇ ਪ੍ਰਕਾਸ਼ੀ ਦਾ ਨਾਮ ਹੈ guru ke gendre satna dev mantra dalav rup hai inna kala da nasra hove te naam prasiddh aur sari sidhi swikar de inder mukha sidhani bahut bahut ਬੈਠੇ ਰਹਤ ਹੈ ਜੇਰ ਦਾ ਤਾਰਿਨ ਆਪਣੇ ਹੋਣੀ ਕਰਕੇ ਜਗਰ ਵੀ ਉਹਨਾਂ ਆਏ ਸਾਰੇ ਦਾ ਆਪਣਾ ਰੂਪ ਹੈ ਆਹਾਲ ਮੂਰਤ ਪੀਰ ਹੈ ਜੇਰ ਕਾਲੀ ਮੂਰਤ ਪਾਲ ਤੇ ਰੂਪ ਨਹੀਂ ਆਂਦਾ ਅਬੀ ਸ੍ਰੀ ਸੈਤੂ ਸੁਦੇਸ਼ ਪ੍ਰਕਾਸ਼ ਜੀ ਦਾ ਹੋਰ ਪ੍ਰਸਾਦ ਦੇ ਸ੍ਰੀ ਗੁਰਪ੍ਰਸਾਦ ਜੀ ਦਾ ਇਹ ਪਰਮਕਾਰ ਆਪੇ ਦੀ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਆਪ ਹੀ ਗ੍ਰੀ ਹੋ ਕਰਕੇ ਪ੍ਰਸਾਦ ਕਰਤਾ ਦਿੱਸਕੀ ਕਰਨਾ ਹੈ ਜਾਂ ਯੋਗ ਪਰਮੇਸ਼ਰ ਹੈ ਨਾਮੀ ਦਾ ਨਾਮ ਜੱਗ ਰਹਿ ਕੇ ਹਮੇ ਸਾਦੇ ਸਾਦੇ ਸਾਰੇ ਜੱਗ ਦੇ ਆਪ ਹੀ ਇਹ ਸਤਿਗੁਰੂ ਕੀ ਸਾਦੇ ਸਾਦੇ ਜਗ ਨੂੰ ਆਪ ਗੁਰੂ ਇਹਨਾਂ ਦੇ ਆਪ ਹੀ ਇਹ ਸਤਿਗੁਰੂ ਹੈ ਐਹੀ ਸਾਦੇ ਕੰਗਲੇ ਜਮਾਨੇ ਦੇ ਵਿੱਚ ਵਰਤਮਾਨ ਸੰਤ ਇਹ ਸਤਿਗੁਰੂ ਹੈ ਗਿਆਨ ਤੇ ਹੋਸੀ ਇਹ ਸਾਦੇ ਜਮਾਨੇ ਦੇ ਵਿਦਿੰਨੋ ਪਰਮੇਸ਼ਰ ਹੋਦੀ ਦੀ ਅੱਗੇ ਨੂੰ ਨੂੰ ਵੀ ਉਹ ਸੱਚੀ ਜੀ ਹੋਵੇਗਾ ਨਾ ਹੋ ਸਕੇਗਾ ਹੋਵੇਗਾ ਐਸੇ ਸਹੀ ਭਾਏ ਬਾਕੀ ਦੇ ਅਰਥ ਜਿਹੜੇ ਅੰਤੋਂ ਆਰੰਭ ਹੋਣਗੇ ਅੰਤਾਂ ਸੰਗਿ ਦੀ ਨਹੀਂ ਸਮਾਂ ਆਪ आरती भाग्य निरागि भाग्य भराई भाग्य मान कहो सीं सतला सोई ला जन जन को रे श्री ओ हमरा सर्व आनंद पूर्ण लीला उन से ही सब नर संत हारिता हे आज कहो हे कंस रे मुकुंद सई देव गुंडरे के मन वारो चाके धाम रे देव कंस हर हर रे जय जय गोदा हे कंस कृष्ण सई दान धार जय भात हो भात रे मैं निर्गुण गुण में नाचती चला हृदय में नाचो जय जय ज्ञान गंगा पीताते सदा एक संग हर मन लाए हरि सोनिना आले देहिं हरि जहियारे तेरे भव तरि पार ये संत हरसिंदे तारि तारि गावा अब तो सब कर कोइ को निरवैर ਹਰ ਕਾਲਮ ਨੂੰ ਜਪੇ ਅਜੂਨੀ ਤੈ ਤੂ ਵਰਪਰ ਸੋਬਿ ਜਪੋ ਆਦਿ ਪਾਤੋ ਜਿਵਾਰੀ ਪਾਤੋ ਅਤੀ ਪਾਤੋ ਕਦੋਂ ਨੂੰ ਅਮ ਜੇ ਮਹਾਰਾਸ਼ਟਰੀ ਪੱਛਾ ਜੀ ਇਹ ਜਾਂਦੇ ਸਮੇਂ ਸਭ ਤੋਂ ਬੰਦੀਏ ਦਿੱਖੀ ਆਈ ਜਿਸ ਵਾਰੀ ਕਦੋਂ ਸਮੇਂ ਪਰਦੇ ਤੇ ਗਏ ਹਮੇ ਯੱਥੇ ਸੁਣਾ ਲਈ ਕੋਈ ਮੇਰ ਕੋਲ ਕੋਈ ਤੇ ਰਾਖੀ ਤੇ ਕੋਈ ਸਮਾਂ ਨਹੀਂ ਬਚਦਾ ਨਹੀਂ ਜਿੰਗਲ ਜਾਈ ਕਿਵੇਂ ਤੇ ਮਿਟ ਕੇ ਵੀ ਨੂੰ ਪਿੱਛੇ ਵੀ ਮਾਲੇ ਤੇ ਆਇਓ ਕੋਈ ਕਲੀਏ ਜਹ ਹੋ ਜਿਆ ਕੋਈ ਮਿਸਰੋ ਬਹੁਤ ਦੁੱਖ ओम काल किसको वैदिक कौन काल वे दल में आए थे आ गए संग कैसे इस काल मॉडर्न गॉड ह्यूमन गेटिंग ऑन है ये भी में गौ मंत्र है आप इनको ओम काल क्यों धारण एनआईसी सैंके सांकु मोरे ओ माँ तो रसी बने हो रहे रे ओंद्रवे कुल जमाहर करो का तुम ਦੇ, सहरा अभी ओम कॉल संगो ज्ञानो पिता है ਕੋਈ ਤੇਰੇ ਮਖਰੂਰ ਕੋਲ ਤੋਂ ਬਾਦ ਨੂੰ ਮੰਗਦਾ ਹੈ ਕੋਈ ਤੇਰੀ ਵੀ ਹੋਰ ਕੇ ਕੀ ਕਰਨ ਦੇ ਕੋਈ ਤੇਰੀ ਖੁਲਫਾਰੀ ਤੇ ਗਿਆਨਕ ਨੂੰ ਸਾਡੇ ਗਾਰ ਮਾਤਰਾ ਉਸੇ ਕਾਬੂ ਤੋਂ ਮੰਗੇ ਹੋਵੇ ਇਸ ਪ੍ਰਕਾਰ ਸਾਡੇ ਜਨ ਮਾਤਰਾ ਮੰਗੇ ਹਨ ਇਹ ਵਕੂਤ ਕ੍ਰਿਮਨ ਦੇ ਗਿਵਧਨ ਮੰਤਾਂ ਵੀ ਇਸ ਪ੍ਰਕਾਰ ਸ਼ਕਤੀ ਨਾ ਹੈ ਹੁੰਦੇ ਹਨ ਦੇਵਤਾਂ ਦੇ ਨਿਵਾਦੋਂ ਘਰ ਦੇ ਸਾਹਮਣੇ ਉਹਨੇ ਸਾਰੇ ਮਿਲ ਕੇ ਕਰਾ ਆਪੇ ਆਦਮੀ ਜਿਹੀ ਜਿੱਤ ਲਾਇਆ ਰਹੀਸ ਆਹ ਕਿਸੇ ਵੰਗ ਮਦਰਾਰੇ ਕੋਈ ਕਿ ਨਾ ਕੋਈ ਹੋ ਹੈ ਉਹ ਜੋ ਹੈ ਉਹ ਆਜ ਹੈ ਗੁਰਤ ਬਾਤ ਨਹੀਂ ਅਵੇ ਇੱਕ ਨੂੰ ਕਹਿਣ ਕਰਦੇ ਹੈ ਇੱਕੇ ਦਾ ਉਜਾਗਨ ਕਰਦੇ ਹੋ ਇਕੇ ਦਾ ਪੂਜਨ ਕਰਦੇ ਹੋ ਇਕੇ ਦੇ ਸੇਵ ਖਾਤ ਕਰਦੇ ਹੋ ਇਕੇ ਨੂੰ ਨੂੰ ਮਨੋਈ ਹੈ ਜਿਸ ਕਰਕੇ ਸਾਡਾ ਜਿਹੜਾ ਮਤਬ ਵਾਤ ਰੂਪ ਹੈ ਉਹ ਜਹਾਜ਼ ਨੂੰ ਨਹੀਂ ਜਿਹਨੇ ਦੋਸਤਾਂ ਦੇ ਕਾਰਜ ਕਰਕੇ ਵਿਵਾਨ ਦਾ ਸਾਰੇ ਹਿੱਸੇ ਵਿਖਾਲਿਆ ਹੈ। ਅਗਰ ਐਂਗਲ ਹੋਵੇ ਤਾਂ ਜਹਾਜ਼ ਨੂੰ ਇਨਸਾਰ ਉਹਨਾਂ ਦਾ ਸਾਲ ਜਿਹੜਾ ਵਖਰੇ ਕਰੇ ਉਸ ਤੋਂ ਕਰਕੇ ਮੰਨੇ ਹੈ। ਅਗੇ ਇਸ ਤਰ੍ਹਾਂ ਦੇ ਕਰਤਨ ਵਾਹਣ ਕਿਤੇ ਉਜਾਣੇ ਆ ਗਿਆ ਹੈ ਤੇ ਫੇਰ ਮਹਾਰਾਜ ਦੀ ਖਾਤ ਵੀ ਹੈ ਮਹਾਰਾਜ ਕਹਿੰਦੇ ਖਾਤ ਵੀ ਇਸ ਲਈ ਹੈ ਉਕਾਰ ਉਕਾਰ ਪ੍ਰਕਾਰ ਇਹ ਖਾਤ ਹੈ ਇਹਦੇ ਚ ਮਾਪੁਰ ਕੋ ਉਕਾਰ ਕੋ ਮਕਾਰ ਕੋ ਉਕਾਰ ਕੋ ਕੋ ਮਾਪੁਰਪਤਾ ਲਹਣ ਜੀ ਉਹ ਕਾਰਜ ਜਿਹੜਾ ਬੰਨਿਆ ਹੈ ਇਹ ਤੁਹਾਨੂੰ ਸਮਝਾਵਾ ਉਹ ਇਸ ਦੇ ਨਾਲ ਜੀ ਕੌਮ ਦੀ ਚਰਖੀ ਹੈ ਤੇ ਅੰਦਰ ਆਦਮ ਕੌਮ ਦੀ ਬੱਥਿਆ ਹੈ ਤੇ ਆਪ ਜੀ ਨੇ ਵਿਆਖਣ ਨੂੰ ਹੀ ਦੱਸਿਆ ਇਹ ਸਾਰੀ ਚੀਜ਼ ਗੁਰਬਾਣੀ ਦੇ ਅੰਦਰ ਆ ਗਈ ਹੈ ਆਪ ਹੁਣ ਕੀ ਕਹਦੇ ਗਏ ਕਿ ਇਸ ਤੇ ਕੌਸ਼ਿਸ਼ ਆਲਿਏ ਇਹ ਅਮਰਤ ਨੂੰ ਬੰਦ ਕਰੇ ਇਹ ਇਹਦੇ ਪੀਰਿੰਦ ਕੋ ਓਮਕਾਰ ਦੇ ਆਰਥਿਕੇ ਤਾਂ ਨਹੀਂ ਲਾਇਆ ਹੋ ਆਪ ਨੇ ਕਿਉਂ ਇਹ ਲਾਇਆ ਹੈ ਕਹਰੀਨ ਕਹਿੰਦੇ ਕੋਈ ਸਾਡਾ ਮਤੁਸਾਰਿਆਂ ਦਾ ਸਮਝਾ ਹੈ ਇਹ ਤੇ ਓਮਕਾਰ ਮੰਤਰੇ ਦੇ ਗਾਰਨਵਾਕ ਤੇ ਬ੍ਰਾਹਮਣ ਉਹ ਕਹਾਰ ਹੈ ਛਤਰੀ ਨੂੰ ਉਹ ਹੈ खुत्ने के दिलचों पे परहे रखा आर्मी है अबे जहव अपना भी स्त्रियों को करनी है अपनी एक आ एक और आपके बनाए कृषव अधिकार है जय गौंकार कहेगा सभी कल्याण हो जाएगी तो इस प्रकार उसकी सबे वापस सांझा मंतुरता है ये मतलब भी बलका के फौलों को बरों फौले हैं ये सिर्फ पुजारी सबब कहानी के आश्रय ਜੇ ਓਮਕਾਰ ਮਨ ਨੂੰ ਤੀਨਿ ਉਜਾਰਨ ਕਰਨਾ ਉਹ ਵੀ ਕਾਲਾ ਕਿਸੇ ਵੇਦ ਬਾਖੋਣ ਦੀ ਕਹਾ ਹੈ ਇਸ ਗੀਂਜ ਦੇ ਉੱਤਰ ਦਿੱਤੇ ਕਿਉਂਕਿ ਮਹਾਰਾਜ ਆਜਾ ਕੇ ਮਤ ਉਹ ਕਰਨ ਵਾਲਾ ਪ੍ਰਕਿਰਿਆ ਦਾ ਕੋਲਦਾ ਹੈ ਉਸ ਸੁਣਨ ਵਾਲਾ ਸਮਝ ਲੈਂਦਾ ਹੈ ਇਸ ਪ੍ਰਕਾਰ ਓਮਕਾਰ ਨੂੰ ਕਰਦਾ ਜਾਇਆ ਹੋਇਆ ਜੀ ਕੜਵਾ ਪੰਦੀ ਨਹੀਂ ਆਈ ਉਹ ਕੜਵੇ ਨਹੀਂ ਜਾਂਦੇ ਸੀ ਇੱਕ ਉਹ ਆਦਮੋ ਸਿੰਧ ਕੀਤਾ ਹੈ ਕਿ ਉਹ ਦਾ ਗੁਰੂ ਪਰਮੇਸ਼ਰ ਹੈ ਇਹ ਜਿਹੜਾ ਉਮਰਦ ਨਾਮ ਹੈ ਆਪ ਜਿਸ ਤੋਂ ਕਰ ਉਹ ਅੰਗ ਹੁੰਦੇ ਆ ਨੇ ਪਹਿਲਾ ਪਵ ਕਿਰਪਾ ਦਾਗੇ ਅਰਥ ਅਦੇ ਜੀ ਉਹਨਾਂ ਦਾ ਇਹਰੇ ਇਸ ਦੀ ਯੋਜਨਾ ਕਿਥੋਂ ਹੈ ਕੀ ਹੈ ਇਸ ਪ੍ਰਕਾਰ ਖੇਤ ਪ੍ਰਕਾਰ ਦੇ ਅੰਨਕਾਰਪੂਰਨ ਵਿਖਿਆਨ ਹੁੰਦਾ ਜਿਸ ਵਿੱਚ ਜਿਆੰਨ ਨਾ ਹੋ ਹੋ ਉਹ ਵਿਖਿਆਨ ਪੂਰਾ ਨਹੀਂ ਹੁੰਦਾ ਤਾਂ ਆਪ ਇਹਦੇ ਵਿੱਚ ਇਹਨਾਂ ਬਣਾ ਦੇ ਆਪ ਇਸ ਪ੍ਰਕਾਰ ਉਹ ਕਰਦੇ ਆ ਸਮੋਤੀ ਦਾ ਦੇ ਕਰਸ਼ੂਤ ਪਾਉਂ ਇਕ ਓ ਅਨਕਾਰ ਜਿਨ ਲਈ ਉਹ ਹੈ ਜੀ ਆਪਣੇ ਈਸ਼ੁਰ ਹੈ ਉਹ ਨਾਲਾ ਦੇ ਅਗੰਗ ਜਿਵੇਂ ਜਿਉਂਕਾਰ ਖੜਿਆਂ ਦਾ ਪ੍ਰਕਾਸ਼ ਹੋਣੇ ਚੰਕੇ ਤੇ ਇਹੇਤੂ ਕਰਨ ਹੋਣੇ ਤੇ ਪ੍ਰਕਾਸ਼ ਹੈ ਸਤਨਾਮ ਇਹ ਸਾਨ ਦਾ ਪ੍ਰਕਾਸ਼ ਕਿਵੇਂ ਜੀ ਕਹਿੰਦੇ ਸਤ ਹੋਣੇ ਚੰਕੇ ਬਾਰੀਓ ਦਾ ਪ੍ਰਕਾਸ਼ਿਤ ਹੈ। ਸੀ ਮਹਾਰਾਜੂ ਸਾਰੇ ਦਾ ਪ੍ਰਕਾਸ਼ ਖੱਬ ਚੀਂਗੇ। ਜੇ ਨਾ ਕੁਸ਼ੀ ਚੀਂਗੇ ਚਲ ਚੀ। ਸਾਰੇ ਵੀ ਸਾਥ ਉਸ ਦੇ ਲਈ ਮੇਰੇ ਲਈ ਚਲ ਚੀ ਦੇਖਣੇ ਚਾਹੀਏ। ਵਿਅਕਤ ਕਰਕੇ ਉਹ ਮਹਾਵਤਨ ਦੇ ਜਿੰਦੇ ਤੱਤਾਂ ਖਾਰੇ ਆ ਹੋਣੇ ਚਾਹੀਏ। ਉਹ ਪਰਸੇ ਕਿਹ ਹੈ? ਕਰਤਾਂ ਚੀਂ ਜਿੰਨ ਕੁ ਪੂਰਨ ਹੋਣੇ ਚਾਹੀਏ। ਆਪਣੇ ਦਾਰਜ ਨੇ ਆਏ ਸੋ ਕੂਰਖੀ ਪੂਰਨ ਹੋਏ ਕਰਦੇ ਕਰਦਾ ਹੈ ਕੂਰਖ ਨੂੰ ਆਰੋਜ ਦੇ ਨਿੰਦਰੀ ਤੋਂ ਹੋਲੇ ਕਰੀਂ ਜੇ ਇਹ ਜੀ ਨੂੰ ਵੀ ਤਾਦ ਕਾਹੋ ਫਿਰ ਬਾਅਦ ਉਹ ਕੂਰਖ ਨਹੀਂ ਹੋਗਾ ਦਾ ਪੂਰਨ ਹੋ ਸਕਦਾ ਉਹ ਇੱਕ ਕਰਕੇ ਉਹ ਕੂਰਖ ਪੂਰਨ ਇਸੇ ਤਰ੍ਹਾਂ ਨਹੀਂ ਹੋ ਸਕੇ ਉਹ ਕਿਸੇ ਪ੍ਰਕਾਰ ਦਾ ਕੋਈ ਕਹਿ ਨਹੀਂ ਹੈ ਜੇ ਮਾਰਾ ਮੇਰ ਕੋ ਆਪ ਜੇ ਜੇ ਨਿਹਾਰ ਹੋ ਦੇ ਕੇ ਉਹਦਾ ਮਾਇਨ ਨਹੀਂ ਜਾਣੂ ਜੋ ਆਪਣਾ ਆਤਮਾ ਨੂੰ ਹੋਣੇ ਕਰਦੇ ਆਕਾਲ ਮੂਰਤ ਹੋਰ ਕਿਤੇ ਨਹੀਂ ਦਾ ਕਾਲ ਵੈਰੀ ਹੈ ਉਹ ਮਗਰਾਤ ਨਹੀਂ ਹੋ ਸਕਦੀ ਉਹ ਮਗਰ ਕਾਲ ਤੇ ਨਾ ਆਵੇ ਤੇ ਕਿੰਕੀ ਆਕਾਲ ਸਿੰਘ ਹੋਣੇ ਕਰਚੋਂ ਨੁਆਜ ਕਾਲ ਤੋਂ ਨਾ ਦੋਈ ਅਸਲੀ ਹੈ ਸਰੂਪ ਹੈ ਹਾਜੂਨੀ ਇਹ ਮਹਾਰਾਯੋ ਕਾਲ ਮੂਰਤ ਕਿਨੇ ਜੇ ਅਜਨਮਾ ਹੋਣੇ ਕਰਕੇ ਨਾ ਤੁਸੇ ਬਾਪ ਨਾ ਮਾਂ ਕਿੰਥੋਂ ਆਇਆ ਜੋ ਕਿਸੇ ਕਰਕੇ ਪੈਦਾ ਨਹੀਂ ਹੋਇਆ ਅਜਨਮਾ ਹੋਣੇ ਕਰਕੇ ਕਾਲ ਮੂਰਤ ਜਿਹੜੀ ਜਨਮੀ ਹੋਈ ਚੀਜ਼ ਹੈ ਜੋ ਜਨਮੈ ਸੋ ਗਿਆਨੋਂ ਮੁਵਾ ਕੇ ਮਿਜਨੇ ਜਨਮੀ ਹੋਈ ਚੀਜ਼ ਮਰ ਜਾਂਦੀ ਹੈ ਉਹ ਗਾਰ ਸ਼ੁਰੂ ਬੇਸੇ ਜਨਮ ਹੋਣੇ ਕਰਕੇ ਗਲਤ ਹੋਣੇ ਤੇ ਹੋਣੇ ਜਨਮ ਹੋ ਕਿਨੇ ਕਿਨੇ ਸੇਪੁ ਮੁਕਤੇ ਤਕਾਸ਼ ਹੋਣੇ ਜਾਈ ਤੇ ਜੇ ਆਪ ਪ੍ਰਕਾਸ਼वान ਹੋਣੇ ਕਹੇ ਹੋਣੇ ਕਰਕੇ ਉਹ ਜਨਮਾ ਹੈ ਗੁਰਪ੍ਰਸਾਦ ਸੁਖੇ ਪ੍ਰਕਾਸ਼ ਕਿਨੇ ਕਹਿੰਦੇ ਗੁਰੂ ਸਾਰਿਆਂ ਦਾ ਉਪਦੇਸ਼ ਗੁਰੂ ਬ੍ਰਹਮਾ ਗੁਰੂ ਮਹਿਨੂ ਗੁਰੂ ਦੇਵ ਮੇਹਰਾ ਮੂਸਾ ਕੇ ਆਪਕਾਰ ਤੋਂ ਸਹੀ ਗੁਰਮੇ ਗੁਰੇ ਨੇ ਧੀਰੇ ਨੋਏ ਉਹ ਉਸ ਗੁਰੂ ਦੇ ਤਾਂ ਸਾਡੀ ਨਮਸਕਾਰ ਹੈ ਜੇਵਾ ਉਹ ਸਾक्षात ਸਾਰਿਆਂ ਦਾ ਗੁਰੂ ਬਣ ਕੇ ਸਭ ਨੂੰ ਬਖਸ਼ ਦੇਣ ਵਾਲਾ ਹੈ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਸਾਰਿਆਂ ਦੇ ਉਹ ਕਿ ਪਾਉਸ਼ਟੀ ਕਰਕੇ ਸਰਬ ਰੂਪ ਧਾਰ ਕੇ ਜਸੇ ਬਾਸਰੂਪ ਧਾਰ ਕੇ ਕਿਰਪਾ ਕੇ ਕਿ ਉਹਦੀ ਪ੍ਰਾਪਤੀ ਹੋਈ ਚਾਹਾਂ ਜਿੱਦਾਂ ਦੇ ਰਿਸ਼ਤੇ ਜਿਉਂਦੇ ਤਾਂ ਪ੍ਰਕਾਰ ਹੋ ਰਿਹਾ ਕਲਾ ਦੇ ਅਰਥ ਇੱਕ ਪੌਣ ਜਿਹੜਾ ਵਾਜਰੂਪ ਹੈ ਦੂਜਾ ਦੂਜਾ ਥਰੀਪ ਕੋਈ ਨਹੀਂ ਜਿਵੇਂ ਜਵਾ ਲਾਸ਼ ਸੁਣ ਆਇਆ ਐਸਾ ਜੋ ਪਰਮੇਸ਼ਰ ਹੋਇ ਅਗੇ ਓਮਕਾਰ ਜਿਹੜਾ ਕਾਮ ਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਤੇ ਓਮਕਾਰ ਗੁਰੇਸ਼ ਨੂੰ ਮਤਨ ਅਨੁਸਾਰ ਅੰਗੀਕਾਰ ਕਰਨ ਵਾਲਾ ਹੈ ਓਮਕਾਰ ਜੋਗੀਆਂ ਦੇ ਮਤਨ ਅਨੁਸਾਰ ਪੂਤਰੋ ਸਵਾਗ ਦਸਮੀ ਦਾ ਸੁਆਸਨ ਜੋ ਹੈ ਓਮਕਾਰ ਹੈ ਇਸੇ ਕਾਰ ਓਮਕਾਰ ਗੁਰੂ ਸਿਖੇ ਨੂੰ ਦਾ ਪ੍ਰਕਾਸ਼ਿਕ ਹੈ ਉਹ ਕਹਿੰਦਾ ਓਮਕਾਰ ਮੁਕਾਪੀ ਜਨ ਸਭ ਰਾਜੀ ਦੇਵ ਪ੍ਰਭਾ ਰਾਮ ਓਮਕਾਰ ਸ਼ਬਦ ਦੇ ਅੰਤਮ ਤੱਕ ਕਿਬਦ 23 ਕਾਲ ਬਾਅਦ ਅਕੂਸ਼ਪਤ ਨੂੰ ਜੋ ਜੋ ਫਾਲਨ ਨਹੀਂ ਸਕਦਾ ਮਾਤਰੋ ਕੇ ਵੰਦ ਰਿਹਾ ਜਿਸ ਦੀ ਸਫਾ ਕਰਕੇ ਮਾਇਆ ਜੀ ਦੀ ਹੈ ਇਹ ਨਹੀਂ ਹੋਦੀ ਕਿ ਤੂੰ ਸਫਾ ਕਰਕੇ ਹੋ ਕੇ ਰਾਸ ਦੀ ਤਾਮ ਦੀ ਸਾਧਕੀ ਤੋਂ ਵਾਲੀ ਹੈ ਕਿਰੋ ਕੈਸਾ ਨਾਮ ਪ੍ਰਸਿੱਧ ਹੈ ਇਸਾਰੇ ਦੁਨੀਆ ਦੀ ਮੁਕਾਸ਼ਿ ਪਿਆਨੀ ਵੇਰ ਸ਼ੌਕ ਹੈ ਤੇ ਨਾਮ ਨਹੀਂ ਲੇ ਕੇ ਮੋਹ ਆਦ ਕਹੇ ਤੇ ਨਾਮ ਆਮ ਆਮ ਖਾਸ ਪਰਬੰਧ ਨਹੀਂ ਜਿਸ ਵਿੱਚ ਆਮ ਨਾਉ ਰੋਗ ਨਾ ਹੈ ਹੈ ਐਸਾ ਉਹ ਕੁੰਪ ਹੈ ਕੋਈ ਕਾਹ ਰੋਗ ਰਹੇ ਤੇ ਮੇਰਾ ਸਭ ਤੋਂ ਜੋਗੀ ਨਾਮ ਇਹ ਸਰਕਾਰ ਦਾ ਨਹੀਂ ਹੈ ਆਮ ਰੋਗ ਜਿਸ ਵਿੱਚ ਸਰਤਾ ਪੁਰਖੋ ਸਾਰੇ ਜਗੂ ਲੱਗਣ ਵਾਲਾ ਹੈ ਅਪੋ ਮਰੇ ਹਕਮਤੀ ਸਾਰੇ ਵੀ ਰੋਟੀ ਦੀ ਪਕੜੀ ਹੋਈ ਹੈ ਕਰਦਾ ਉਹ ਕਰਕੇ ਤੋਂ ਸਾਰਿਆਂ ਦੀ ਰੋਟੀ ਦੀ ਧਾਰ ਸਾਰਿਆਂ ਦੀ ਜੀਵਨ ਦੀ ਧਾਰ ਸਾਰੇ ਦੀ ਕੇਦਨਸਾ ਰੂਪੀ ਧਾਰ ਉਹਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਇਹ ਤੇ ਬਾਹਰ ਸਾਰਿਆਂ ਨੂੰ ਤਾਰਨ ਕਰਨ ਵਾਲਾ ਹੈ ਕੌਨ ਨੂੰ ਕਰਨ ਵਾਲਾ ਹੈ ਉਹ ਕਰਦਾ ਹੀ ਕੋਈ ਹੈ ਬਾਕੀ ਸਾਰੇ ਕਾਰਨ ਉਹ ਜਿੰਨਾ ਸਾਰਾ ਸਫਾਰ ਹੈ ਪਰ ਉਹ ਦੇਰ ਦੇ ਦਰਦ ਦੇ ਦੇ ਤਾਰਨ ਵਾਲਾ ਹੈ ਆਪਣੇ ਕਰਤਾ ਉਹ ਸਾਰੇ ਜੰਕੂ ਕਰਨ ਵਾਲਾ ਹੈ ਆਪਣੇ ਰੂਪ ਸਾਰਿਆਂ ਦੇ ਨਾਲ ਰੁਕਤ ਕ੍ਰੀਮ ਦੇ ਨਾਲ ਲੁਕਿਆ ਹੋਇਆ ਫਿਰ ਦਾ ਰੂਪ ਹੋ ਕੇ ਸਾਰਿਆਂ ਦੀ ਆਸਕ ਪੁਰਖ ਕੋਈ ਪੁਰਖ ਪੂਰਨ ਐਸ ਪਰਿਭਾਸ਼ਾ ਦੇ ਅਤੇ ਇੱਕੋ ਪੁਰਖ ਸਵਾਈ ਨਾ ਸਾਰੇ ਜੀ ਜਾਂ ਤੀਸਰੀਆਂ ਵੀ ਨਹੀਂ ਆਈਆਂ ਇੱਕੋ ਜੋ ਪੁਰਖ ਮਰਦੇ ਨੇ ਆਈਆਂ ਸਦਮ ਕੇ ਬਾਕੀ ਸਾਰੀ ਸਿਟੀ ਇਸ ਤਰ੍ਹਾਂ ਦਾ ਪੁਰਖ ਹੈ ਅਤੇ ਘੇਰ ਉਹ ਕੈਸਾ ਪੁਰਖ ਹੈ ਪੁਰਖ ਸੰਗਠਨੀ ਨੂੰ ਆਦਿਕ ਮਰਦ ਨੂੰ ਕਰਨ ਵਾਲਾ ਹੈ ਅਤੇ ਪੁੰਨਿਆ ਪੁੰਨੇ ਦੀ ਖਾਤ ਦਾ ਉਹ ਗਿਆਨਕ ਹੈ ਸਾਰੇ ਵਿਹਾਰ ਦੀ ਜੀਵਨ ਖਾਣ ਆਸ ਕਰਨ ਆਇਆ ਹੈ ਅਤੇ ਫੁਰਖ ਤੋਂ ਸ਼ਖਰ ਕੋਖਤ ਪ੍ਰਸ਼ਾਨ ਕਰਾਵਾ ਹੈ ਇਸ ਪ੍ਰਕਾਰ ਦੁਰਖ ਕਾਦੇ ਅੰਤਮ